ਈੜੀ ਅਖਰ ਨੂੰ ਈਵੜੀ ਲਿਖਿਆ ਹੈ ਗੁਰਬਾਣੀ 'ਚ ਤੇ ਸਿਰਫ ਗੁਰੂ ਨਾਨਕ ਸਾਹਿਬ ਦੀ ਪਟੀ ਵਿੱਚ ਇਸ ਦਾ ਉਪਦੇਸ਼ ਦਿੱਤਾ ਹੈ ਜੀ ਈਵੜੀ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਹਨਾ ਅੱਖਰਾਂ ਮਹਿ ਜੋ ਗੁਰਮੁਖੀ বুঝੇ ਤਿਸ ਸਿਰ ਲੇਖ ਨ ਹੋਈ ਈਵੜੀ ਪਾਵੇਂ ਲਿਖਿਆ ਹੋਇਆ ਪੂਰੇ ਪਰ ਅੱਖਰ ਆੜੇ ਤੋਂ ਹੀ ਬਣਾਇਆ ਹੋਇਆ ਹੈ। ਈਵੜੀ ਆਦਪੁਰਖ ਹੈ ਦਾਤਾ। ਉੱਤੇ ਪੰਜਵੇਂ ਪਾਤਸ਼ਾਹ ਨੇ ਆਦਗੁਰੇ ਨਾਮੇ ਜੁਗਾਦਗੁਰੇ ਨਾਮੇ ਬਣਾਇਆ। ਆਦ ਨਾਲੇ ਉਹਨਾਂ ਨੇ ਬਣਾਇਆ। ਆਦਗੁਰੇ ਨਾਮੇ ਜੁਗਾਦਗੁਰੇ ਨਾਮੇ ਸਤਗੁਰੇ ਸ੍ਰੀ ਗੁਰਦੇਵ ਨਾਮੇ। ਕਰਕੇ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ। ਉਹ ਦਾਤਾ ਆਦਪੁਰਖ ਹੈ। ਆਪੇ ਸੱਚਾ ਹੈ ਸੋਈ। ਉਹ ਸੱਚਾ ਹੈ। ਸੱਚਾ ਹਮੇਸ਼ਾ ਰਹਿਣ ਵਾਲਾ ਹੈ ਉਹ। ਮਾਇਆ ਨਾਲ ਲਿਪਤ ਨਹੀਂ ਹੁੰਦਾ। ਇਨਾ ਘਰਾਮ ਹੈ ਕੋਈ ਗੁਰਮੁਖ ਪੁੱਛੇ ਦੇਖੋ ਉਹ ਇਹਨਾਂ ਨੂੰ ਅੱਖਰ ਕਹਿੰਦੇ ਨੇ ਜਿਹੜੇ ਲਿਖੇ ਨੇ ਜਿਹੜੇ ਉਹਨਾਂ ਦੇ ਕੋਲ ਅੱਖਰ ਸੀ ਉਹ ਰਣ ਵੀ ਅੱਖਰ ਕਹਿਆ ਜਿਹੜੇ ਆਇਆ ਅੱਖਰ ਪਾਏ ਨੇ ਇਹ ਵੀ ਅੱਖਰ ਨੇ ਇਹਨਾਂ ਨੂੰ ਬੋਲਿਏ ਇਨਾ ਘਰਾਮ ਹੈ ਕੋਈ ਗੁਰਮੁਖ ਪੁੱਛੇ ਤਾਂ ਸਰ ਲੈਣਾ ਉਹ ਇਨਾ ਘਰਾਣੇ ਵਿੱਚ ਕੋਈ ਇਹ ਬੁਝਾਰ ਤੋਂ ਲਵੇ ਉਹਦੇ ਸਿਰ ਪੁੰਨ ਪਾਪ ਦਾ ਲੇਖ ਨਹੀਂ ਹੁੰਦਾ ਨਾਲੇ ਤਨ ਦਾ ਜੇ ਲੱਭੀ ਨੋ ਕੋ ਦਾ ਲੇਖਾ ਪਾਟਿਆ ਜਾਂਦਾ ਦਾਤਾ ਇਹ ਸ਼ਬਦ ਗੁਰੂ ਹੈ ਦਾਤਾ ਆਪੇ ਸੱਚਾ ਸੋਈ ਸ਼ਬਦ ਗੁਰੂ ਵੀ ਹੈ ਜੋਤ ਵੀ ਹੈ ਆਦ ਜੋਤ ਤਾਂ ਸ਼ਬਦ ਹੋਈ ਆਦ ਨੇ ਕੋਈ ਆ ਮੰਨੇ ਨਹੀਂ ਸਕਦੇ ਆ ਸੰਦੇ ਵਿੱਚ ਤੁੰਕਾਰ ਹੁੰਦਾ ਇੱਕ ਮੁਹਿੰਦਾਲੇ ਇਹਨਾਂ ਖਰਾਂ ਜੋ ਦਾ ਗਿਆਨ ਪ੍ਰਾਪਤ ਕਰਨਾ ਬੁੱਝਣਾ ਬਿਜਾਰਤਾ ਹੈ ਡਾਇਰੈਕਟ ਗੱਲੀ ਗੱਤੀ ਦੀ ਜਾ ਸਕਦੀ ਉਹ ਬੋਲਣ ਤੇ ਪਰੇ ਹੈ ਗੱਲ ਫਿਰ ਜੋ ਜੀ ਫਿਰ ਤੇ ਪਰ ਇਹ ਉਪਦੇਸ਼ ਗੁਰਬਾਣੀ ਜੋ ਬੁੱਝਣਾ ਆਪਾ ਹੁਕਮ ਬੁੱਝ ਲਾ ਲੇਖਾ ਰਹਿੰਦਾ ਹੀ ਨਹੀਂ ਹੈ ਹੁਕਮ ਨਾਲ ਤਾਂ ਸਭ ਕੁਝ ਹੁੰਦਾ ਹੀ ਹੈ ਜਿਹੜਾ ਜਿਹੜੇ ਹੁਕਮ ਨੂੰ ਨਹੀਂ ਮੰਨਦੇ ਉਹ ਦੇਖਾ ਮੰਨਦੇ ਨੇ ਹਾਂ ਇਹ ਵੀ ਤੋ ਇਹ ਸੰਦੇਸ਼ ਇੱਥੇ ਸਮਾਪਤ ਹੈ ਜੀ ਜੋ ਆਪਾਂ ਨੂੰ ਸੰਦੇਸ਼ ਗੁਰੂ ਨਾਨਕ ਸਾਹਿਬ ਨੇ ਦਰੜ ਕਰਾਇਆ ਪਹਿਲੇ ਪਾਸ਼ਾ ਦੀ ਪੱਟੀ